ਹਾਂਜੀ ਵੱਖ ਖਾਲਸਾ ਵਾਹਿ ਫਤੇ ਜੀ। ਵੱਖ ਜੀ ਵਾਹਿ ਫਤੇ। ਅ ਅਸੀਂ ਅੱਜ ਤੋਂ ਹੁਣ ਜੋ ਸਵਈਏ ਆਪਣੇ ਆਦ ਗ੍ਰੰਥ ਦੇ ਆਖੀਰ ਵਿੱਚ ਭਟਾਂ ਦੇ ਉਚਾਰੇ ਹੋਏ ਸਵਈਏ ਉਹਨਾਂ ਦੀ ਆਪ ਤੋਂ ਜੋ ਅਰਥ ਹੈ ਉਹਨਾਂ ਦਾ ਬੋਧ ਲਵਾਂਗੇ ਪਰ ਉਸ ਤੋਂ ਪਹਿਲਾਂ ਜੋ ਇਹਨਾਂ ਦਾ ਥੋੜਾ ਇਤਿਹਾਸਿਕ ਪੱਖ ਹੈ ਵੀ ਭਟ ਕੌਣ ਸਨ ਤੇ ਕਿਸ ਪਰਥਾਏ ਜੋ ਸਵਈਏ ਉਚਾਰੇ ਗਏ ਹਨ ਅਸੀਂ ਉਸ ਗੱਲ ਤੇ ਵੀ ਥੋੜੀ ਆਪ ਨਾਲ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ ਜੇ ਤੁਸੀਂ ਸਾਨੂੰ ਦੱਸ ਸਕੋ ਕਿ ਕਿਸ ਪਰਥਾਏ ਇਹ ਸਵਈਏ ਉਚਾਰੇ ਗਏ ਹਨ ਕਿਉਂਕਿ ਇਸ ਦਾ ਕਾਫੀ ਭੇਦ ਹੈ ਅਜੇ ਪੰਥ ਵਿੱਚ ਕੋਈ ਇਕਸਾਰਤਾ ਨਹੀਂ ਕਿ ਮਹੱਲੇ ਜੋ ਵੀ ਹੈ ਪੰਜ ਮਹੱਲਿਆਂ ਦੇ ਸਵਈਏ ਉਚਾਰੇ ਗਏ ਹਨ ਉਹ ਕਿਸ ਪਰਥਾਏ ਹਨ ਤੁਸੀਂ ਸਾਨੂੰ ਇਸ ਬਾਰੇ ਆਪਣੀ ਖੋਜ ਚੋਂ ਦੱਸ ਸਕੋ ਇਹ ਇਹ ਪਾਸਮਾ ਹਾਂ ਹਾਂਜੀ ਦਾ ਹਾਂ ਕਮਾਟ ਗੁਰੂ ਘਰ ਨਾਲ ਪ੍ਰਾਣ ਆ ਰਹੇ ਹਨ ਅੱਛਾ ਜੀ ਤਾਂ ਆਸ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਹੈ ਨਾ ਅੱਛਾ ਜੀ ਇਹ ਆਈਬਤੀ ਤੋਂ ਦੇ ਜਿਹੜਾ ਖਾਣ ਹੈ ਇਹੋ ਦੇ ਪੱਟ ਫਰੇ ਤੇ ਆਈਬਤੀ ਤੋਂ ਦਾ ਗੁਰੂ ਘਰ ਬਹੁਤ ਐਜਰ ਹੈ ਅੱਛਾ ਜੀ ਦੁਰਗਲ ਨਾਮਾਈ ਦਾਸੀ ਹੋਣਾ ਹੂੰ ਹੂੰ ਇਹ ਕਰਕੇ ਨਾ ਦਾ ਪੁਰਾਣਾ ਸਮਾਂ ਤੜੇ ਹੂੰ ਹੂੰ ਤੇ ਇਹ ਅਲਾਦ ਹੈ ਅੱਗੇ ਕੀਰਤੀ ਆ ਜਿਹੜਾ ਹੈਗਾ ਹੂੰ ਹੂੰ ਇੱਕ ਪੱਟਾ ਦਾ ਪਰਿਵਾਰ ਹੈ ਇਹ ਜਿਵੇਂ ਕੁਰਬਾਨੀ ਜੋ ਆਪਾਂ ਨੂੰ ਪਤਾ ਲੱਗਦਾ ਵੀ ਬੇਦ ਜਿਹੜੇ ਪਿੱਛੇ ਪਹਿਲਾਂ ਬੇਦ ਸੀ ਇਹ ਉਹਨਾਂ ਚ ਪਰਮ ਗਿਆਤ ਹੈਗਾ ਹਮ ਹਮ ਭਾਵੇਂ ਫਿਰ ਤੋਂ ਦੇ ਵਿੱਚ ਬਹੁਤ ਕੁਝ ਹੋਰ ਵੀ ਗਿਆਨ ਹੈ ਦੁਨੀਆਂ ਪਰ ਦਾ ਗਿਆਨ ਹਰ ਤੇ 70 ਸਾਲ ਦਾ ਗਿਆਨ ਬੇਦਜ ਇਕੱਠਾ ਕਰਤਾ ਸੀ ਹਮ ਹਮ ਅੱਛਾ ਤੇ ਉਹਨੇ ਉਹਨੇ ਚਲਾਣਾ ਰੈਲਵੇ ਹਮ ਹਮ ਗਿਆਨ ਵੀ ਫਿਰ ਤੋਂ ਸੀ ਅੱਛਾ ਜੀ ਇਹਨਾਂ ਦਾ ਬ੍ਰਹਮ ਗਿਆਨ ਉਹਨਾਂ ਦਾ ਸਮਾਪਤ ਰਿਹਾ ਬ੍ਰਹਮ ਗਿਆਨ ਲੈ ਲਾਂ ਤੇ ਜੀਨਾਂ ਦਾ ਆਯੁਰਵੇਦ ਨੂੰ ਸਮਝ ਸੀ ਆਯੁਰਵੇਦ ਲੈ ਲਓ ਸੀ ਕੋਈ ਕੁਛ ਲੈਣਾ ਤਾਂ ਕੋਈ ਕੁਛ ਲੈਣਾ ਤਾਂ ਜਿਹੜਾ ਗਿਆਨ ਤੁਸੀਂ ਚਾਹੀਦਾ ਲੈ ਲਓ ਤਾਂ ਸਹੀ ਹੈ ਜੀ ਬ੍ਰਹਮ ਗਿਆਨ ਬੇਤਾ ਵੀ ਤੁਸੀਂ ਹੂੰ ਐਸੇ ਕਰਾਉਂਦੇ ਤਿਆਰ ਕਰ ਲਿਆ ਸੀ ਹੂੰ ਹੂੰ ਪਹਿਲਾਂ ਵੇਦ ਕੋਈ ਹੁੰਦਾ ਸੀ ਫਿਰ ਇਹਦੇ ਚਾਰ ਬਣਾਤੇ ਇਹ ਵੀ ਸੁਣੇ ਹੂੰ ਹੂੰ ਉਹ ਚਾਰ ਪਨਾਥ ਤੇ ਇੱਕ ਸੀ ਆ ਵੀ ਸੀ ਆਪਣੇ ਵੈਦ ਦੇ ਵਿੱਚ ਦੀ ਬੈਠੇ ਬੇਦਾਂ ਜੋ ਗਿਆਨ ਪਰਮ ਗਿਆਨ ਸੀ ਹੂੰ ਉਹ ਵੀ ਜਿਹੜੇ ਵੈਦ ਹੁੰਦੇ ਹੈ ਹੂੰ ਕੀ ਦਲਤੇ ਸਾਰੇ ਸਰਬਤਰੀ ਠੀਕ ਹੈ ਜਿਹੜੇ ਕੁਜੀ ਦੇ ਹਾਂ ਜਿਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ ਪਰ ਜੋ ਵਰਜੀ ਕਹਿੰਦੇ ਫਿਰ ਕੋਰੋਂ ਤਾਂ ਸਿੱਖੀ ਦਾ ਵੀ ਨਹੀਂ ਪਤਾ ਹੂੰ ਹੂੰ ਦੇਖਾ ਜਾ ਹੈ ਜਿਹੜੇ ਵਿਦਵਾਨ ਨੇ ਸਿੱਖੀ ਦਾ ਤਾਂ ABC ਦਾ ਪਤਾ ਨਹੀਂ ਰੌਣਾ ਪਾਈ ਜਾਂਦੇ ਵੇ ਬਦਲੋ ਕੁਛ ਨਹੀਂ ਬਦਲੋ ਠੀਕ ਹੈ ਹਰ ਬਾਏ ਦੇ ਗਾਂਵਾਰੇ ਕੁਛ ਨਹੀਂ ਪਤਾ ਮੈਂ ਆਉਣਾ ਜਾਂਦੇ ਤੇ ਹਮ ਹਮ ਬੁੱਲ ਬਲੰਕ ਦਾ ਬੰਨ ਲੇਤੀ ਬਦਲ ਲਿਖੋ ਕਿਥੋਂ ਕਿਥੋਂ ਵੀਰੀ ਲਿਖ ਰਿਹਾ ਹੈ ਹੈਗਾ ਹੀ ਰੌਲਾ ਰਿਹਾ ਬੁੱਤਾ ਅੱਛਾ ਜੀ ਜਾਂ ਤਾਂ ਉਹ ਪਾਬੜਾ ਹੀ ਰਖਾ ਕਰਦੇ ਰਹੇ ਲੱਗਦੇ ਸੀ ਕੀ ਕਰਦੇ ਸੀ ਕੀ ਨਹੀਂ ਕਰਦੇ ਹਮ ਹਮ ਉਹ ਦੋ ਪਰ ਉਹਨਾਂ ਨੇ ਕੋਈ ਜੀ ਬੀ ਬੀ ਕੋ ਨਾ ਬਿਲਾਇ ਵਰੋਂ ਕਿ ਹਰੋ ਦੀ ਕੋਈ ਚੀਜ਼ ਧੀ ਹੋਰੀ ਕੋਸ਼ਿਸ਼ ਕੀਤੀ ਬਿਜਲੀ ਵਾਲੇ ਨਾਲ ਉਹਨਾਂ ਤੋਂ ਕੀਤੀ ਕੋਸ਼ਿਸ਼ ਠੀਕ ਹੈ ਜੀ ਫੋਟੋ ਨੂੰ ਜਾਵਤ ਕਰਨ ਦੀ ਕੋਸ਼ਿਸ਼ ਕੀਤੀ ਭਗਤ ਗੁਰਨਾਥ ਦੇ ਬਾਅਦ ਚ ਹੋਏ ਨੇ ਫਿਰ ਪਟਾਣੋਂ ਸਰਵਸਥੀ ਬੜਾ ਬੋਲਣ ਦੀ ਕੋਸ਼ਿਸ਼ ਕੀਤੀ ਬਿਜਲੀ ਵਾਲਿਆਂ ਨੇ ਖਾਸ ਕਰਕੇ ਕੀਤੀ ਕਿਵੇਂ ਕਰ ਦਿੰਦੇ ਮਰਬਾਨੀ ਸਭ ਆਉਣੇ ਕੋਕ ਤਾਂ ਜੇ ਪਹਿਲਾਂ ਇਹਦਾ ਉਹ ਹੋ ਚੁੱਕੇ ਨੇ ਭਗਤ ਗੁਰਨਾਥ ਨੇ ਤਾਂ ਨਾਲ ਲਿਆ ਜਾਣਾ ਹਮਮ ਭਗਤਾਂ ਦੀ ਵੀ ਸੁਣਾਈ ਇਹ ਨਾਮ ਲੈ ਆਇਆ ਹਮਮ ਭਗਤਾਂ ਦੀ ਬਾਣੀ ਕੋ ਨਾਮ ਦਾ ਕਹੇ ਜਗਦੀ ਉਹਦਾ ਹਮਮ ਸਰ ਸ਼ਬਦ ਵੀ ਵਿੱਚ ਕਬੀਰ ਨੂੰ ਸਭ ਤੋਂ ਪਹਿਲਾਂ ਗਿਆਨ ਹੋਇਆ ਗੁਰੂ ਗੁਰੂ ਸਾਹਿਬ ਦੇ ਵਿੱਚ ਲਿਖਿਆ ਹੋਇਆ ਇਹ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਨਹੀਂ ਕੀਤੀ ਝੂਠ ਬਹੁਤ ਬੋਲੇ ਚੁੱਪ ਕਰਕੇ ਬਹਿ ਜੇ ਚੁੱਪ ਕਰਕੇ ਬਹਿ ਜੇ ਕੋਝਲੀ ਪੱਲੇ ਬੋਝੜੀ ਆਉਂਡ ਚੁੱਪ ਕਰਕੇ ਬਹਿ ਗਏ ਇਹ ਦਿਨਾਂ ਸਿੱਖੀ ਦਾ ਬਣਿਆ ਕੁਝ ਨਹੀਂ ਬਗੜਿਆ ਇਹ ਜੋਰਾਂ ਨੇ ਹੁਣ ਦੇ ਕੀਤਾ ਨਾ ਹਾਂਜੀ ਬੰਦਾ ਕੁਝ ਨਹੀਂ ਉਹ ਵੇਰ ਕਹੋ ਜੀ ਉਹ ਕਹੋ ਜੀ ਇਹ ਕਹੋ ਜੀ ਹੂੰ ਹੂੰ ਸਿੱਖੀ ਦਾ ਬਣਾਇਆ ਉਹ ਨਾ ਆਪਾਂ ਨੂੰ ਆ ਸਿੱਖੀ ਦਾ ਇਹ ਦਿਨਾਂ ਬਗੜਿਆ ਸਿੱਖੀ ਦਾ ਕੋਈ ਸਮਝ ਆਦੀ ਅੱਜ ਤੱਕ ਹੂੰ ਹੂੰ ਸਿੱਖੀ ਦਾ ਨਜ਼ਾਰਾ ਹੁੰਦਾ ਠੀਕ ਹੈ ਜੀ ਪਰ ਮਤ ਇਹ ਨਾ ਗੱਲਾਂ ਨਾ ਕੀ ਹੁੰਦਾ ਹੂੰ ਹੂੰ ਬੰਦਾ ਜੁੰਦਾ ਸੱਚ ਨਾਲ ਹੈ ਆ ਦੇਣ ਲੱਗੇ ਮਤਲਬ ਹੈ ਪੇਸ ਵਿੱਚ ਕਹਿਣਾ ਬਦਲਿਆ ਪਰ ਗਿਆਨਸੀ ਗੁਰਮੁਖੀ ਬਣ ਗਈ ਹੈ ਠੀਕ ਹੈ ਜੀ ਮੈਂ ਤਾਂ ਮੈਂ ਨਾ ਬੋਤ ਤਵ ਸੁਣਿਆ ਨਹੀਂ ਫਿਰ ਇਹ ਜਿਉ ਬੈਠਾ ਲਿਆ ਝੂਠੇ ਝੂਠਾ ਜੋੜਨਾ ਵਿਚਾਰ ਗ੍ਰੰਥ ਮੁਖ ਵੇਦ ਪਾਠ ਕੰਪਰੰਤ ਵੇਦ ਸੰਹਿ ਵੇਦ ਪਾਠ ਕਤੂ ਮੁਖ ਹੈ ਸਰੋਤ ਸਭ ਦਾ ਵੇਦ ਹੈ। ਹਮਮ। ਪਰ ਆਪਣੇ ਤੇਰੇ ਨੀਦੋ ਸਕਦੇ ਗੁਰੂਆਂ ਦੇ ਵਿੱਚ ਕਹਿੰਦੇ ਪਰ ਸਰੋਤ ਸਾਰਿਆਂ ਦਾ ਵੇਦ ਹੈ। ਸਰੋਤਾ ਨਾ। ਹਮਮ। ਜੈ ਉਹ ਹੈ ਜੀ ਵੀ। ਠੀਕ ਹੈ ਜੀ। ਇਸ ਤਰ੍ਹਾਂ ਅਸੀਂ ਗੁਰਬਾਨੀਆਂ ਦਾ ਦਾਸ ਕਿਵੇਂ ਕਰਤਾ। ਹਮਮ। ਗੁਰਬਾਨੀ ਵੀ ਇੱਕ ਵੀ ਭਗਤੀ ਨੂੰ ਦਾਸ ਦੀ ਕੀਤਾ ਜਾ ਸਕਦਾ ਜੇ ਕੋਈ ਸਿੱਖਿਆ ਕੋਈ ਕਰ ਸਕਦਾ। ਠੀਕ ਹੈ ਜੀ। ਜੇ ਤੇ ਮੈਂ ਤੁਹਾਨੂੰ ਕਹਾਂਦਾ ਹਮਮ ਦੇ ਕਹਦਾ ਰਹੇ ਹੋ ਜੀ ਨਾ ਬੋਰਵਾਨੀ ਨਾ ਨਾ ਜਰਾਤੀ ਠੀਕ ਹੈ ਜੀ ਇਹ ਲੋਕਾਂ ਨੇ ਜਾਣ ਬੁੱਝ ਕੇ ਨਗਰ ਸਰਕਾਰ ਕਰਕੇ ਸਿੱਖੀ ਦਾ ਬੜਾ ਨੁਕਸਾਨ ਕੀਤਾ ਹਮਮ ਉਹਨੇ ਮੇ ਕੋਈ ਨਹੀਂ ਉਹ ਤਾਂ ਦੱਸਿਆ ਨਾ ਵੀ ਤਾਂ ਬਹੁਤ ਵੈਰ ਹੋ ਗਿਆ ਬਸ ਠੀਕ ਹੈ ਜੀ ਕੋਈ ਜੇ ਬੋਗੇ ਕਹੋ ਇਹ ਹੂੰ ਕਹਾਂ ਕੁਛ ਨਹੀਂ ਰੋ ਕਹੜੂ ਬਾਤ ਜਿਹੋ ਸੱਚ ਹੈ ਹੁੰਦਾ ਹੈ ਕੂੜ ਜੋ ਹੈ ਕੂੜ ਸਾਫਤ ਹੋ ਜਾਂਦਾ ਕੂੜਾ ਕੂੜ ਦੇ ਕੋਟੇ ਨਾਲ ਸੱਚ ਲਈ ਸੱਚ ਨੇ ਆਪੇ ਰਹਿ ਜਾਣਾ ਸੱਚ ਨੂੰ ਆ ਕੇ ਪਛਾਣਣਾ ਲੋਕਾਂ ਨੇ ਹੂੰ ਤਾਂ ਕੋਣ ਹੈ ਆਪੇ ਸਾਫਤ ਹੋਈ ਨੂੰ ਕੂੜੇ ਠੀਕ ਹਾਂ ਜੀ ਅੱਛਾ ਅਸਾਂ ਚੱਲਦਾ ਉਹਦਾ ਹੂੰ ਹੂੰ ਅਡੇ ਵੀ ਦਾ ਕੋਰਵਾ ਨਾਲ ਕੰਮ ਚੱਲਦੇ ਹੀ ਤੇ ਹਾਂ ਹਾਂ ਫਿਰ ਉਹਨੇ ਜਾਇਨਾ ਦੇ ਬਜ਼ੁਰਗਾਂ ਨੇ ਲਿਖਿਆ ਸੀ ਹੂੰ ਹੂੰ ਉਹ ਕੇ ਰੁੜ ਗਏ ਤੇ ਅੱਛਾ ਜੀ ਆਹ ਉਹਨੇ ਤਾਂ ਜਾ ਕੇ ਪਰ ਪਿਆਰ ਬਿਲਕੁਲ ਕਲੀਅਰ ਨਹੀਂ ਹੈ ਉਹ ਡੇਟਾ ਦੇ ਵਿੱਚ ਤੇ ਜੋ ਅਰਜੀ ਤੇ ਉਹ ਡੇਟਾ ਵਿੱਚ ਉਹ ਕਲੀਅਰ ਸੀ ਹੈ ਬਲਕਿ ਉਹ ਰੋੜੇ ਵਿੱਚ ਬਿਲਕੁਲ ਹਾਂ ਹਾਂ ਗੋਣੌਤ ਬਾਰੇ ਪੇਸ਼ ਪ੍ਰੋਟੇਜਰਾ ਕਰਾ ਰਿਹਾ ਰਹੇ ਹਾਂ ਬਲਕਿ ਬਾਕੀ ਜੇ ਤੋ ਇਹ ਬੜਤਨਾ ਬੜ ਪਾਰੀ ਹੈ ਇਹਨਾਂ ਬ੍ਰਾਹਮਣਾਂ ਦੇ ਹੋਰ ਇਤਿਹਾਸ ਖੜਦਕਾ ਆਇਆ ਮਰ ਰਿਹਾ ਉਹ ਪੜ੍ਹਦੇ ਹੋਗੇ ਹਾਂ ਉਹ ਬਹੁਤ ਹੱਡਰੇ ਦੇ ਪੜ੍ਹਦਾ ਟੋਗੇ ਹਾਂ ਹਾਂ ਬ੍ਰਾਹਮਣ ਦਾ ਬੇਦਰਾ ਜੁੜਿਆ ਹੋਇਆ ਹੈ ਕਿਆ ਨਾਲ ਜੁੜੇ ਨੇ ਪਰਨਸ ਆ ਬਲੂ ਸਭਾ ਉਹ ਜਿਹੜਾ ਜੁੜ ਗਿਆ ਹੂੰ ਆ ਰਹਾ ਤਾਂ ਮੈਂ ਉਹਦੇ ਨਾਲ ਟਕਰਾਇਆ ਫਿਰ ਗਿਆ ਹੁੰਦਾ ਸਾਡਾ ਹੂੰ ਹੂੰ ਉਹ ਜਿਹੜੇ ਬ੍ਰਾਹਮਣ ਉੱਪਰ ਵੀ ਨੇ ਪਰਨਸ ਨਾਲ ਜੁੜੇ ਉਹਨਾਂ ਨਾਲ ਟਕਰਾਉਣਾ ਬਿਲਕੁਲ ਨਹੀਂ ਹੈਗਾ ਹੁੜ ਵੀ ਹੈਗੇ ਨਾ ਅੱਛਾ ਜੀ ਜਦੋਂ ਅੱਜ ਬਹੁਤ ਨੇ ਸਾਥ ਮੇਰੇ ਸੰਤ ਵੀਰ ਦਾ ਬ੍ਰਾਹਮਣ ਵੀਰਾਂ ਜਿਹੜੇ ਬਿਲਕੁਲ ਪੈਰ ਚ ਪੈਰ ਤੋਂ ਦੇਖੋ ਲੇਖ ਬਹੁਤ ਵਧੀਆ ਦਾ ਰਾਹ ਹੈ ਬਹੁਤ ਆਗਾ ਠੀਕ ਜੀ ਉਹ ਬਿਲਕੁਲ ਹਾਂ ਉਹ ਸਾਡਾ ਟਕਰਾ ਪੈਂਦਾ ਆ ਕੇ ਪੱਥਰ ਪੂਜ ਵਾਲਿਆਂ ਨੂੰ ਪੁੱਲ ਜੀ ਉਹ ਜਿਹੜੇ ਆਪਾਂ ਗਿਆਦੀ ਦੇ ਆਪ ਬਹੁਤ ਉਹਨਾਂ ਨਾਲ ਗੱਲ ਸਾਡਾ ਠੀਕ ਹੈ ਜੀ ਤੇ ਉਹਨ ਸੇ ਕੀ ਪਤਾ ਲੱਗਿਆ ਇਹਨੂੰ ਹੂੰ ਉਹ ਜਿਹੜਾ ਸਾਡੇ ਬਜ਼ੁਰਗਾਂ ਅੱਛਾ ਜੀ ਗੁਰੂ ਘਰ ਦੀ ਪ੍ਰਗਟ ਹੋ ਗਿਆ ਹੂੰ ਹੂੰ ਜਿਹੜਾ ਬ੍ਰਾਹਮਣ ਸੀ ਛਤਰੀਆਂ ਦੇ ਪ੍ਰਗਟ ਹੋ ਗਿਆ ਕਸਤਾ ਸੀ ਉਹ ਅੱਛਾ ਜੀ ਛਤਰੀ ਨੇ ਹੂੰ ਹੂੰ ਆਏ ਗੁਰੂ ਘਰ ਚ ਆਏ ਕਿਹੜਾ ਕੋਈ ਜਨਾ ਜਨਾ ਪਹਿਲਾ ਕੋਈ ਥਾਵੀਆਂ ਨਾਲ ਕੋਈ ਹੋਰ ਜਿਹੜੀ ਸਬਤ ਸੀ ਲਈ ਗੁਰੂ ਘਰ ਅੱਛਾ ਜੀ ਉਹਦੇ ਤੋਂ ਆਇਆ ਪਰ ਇੱਕ ਅੱਛਾ ਜੀ ਇਹ ਵਾਰ ਜਦੋਂ ਜੀ ਬੇਨਕ ਕਰਦੇ ਸਨ ਉਸ ਤੋਂ ਇਹ ਹੀ ਗੱਲ ਹੂੰ ਹੂੰ ਬੁਰ ਕਰਕੇ ਪਤਾ ਲੱਗਿਆ ਹਾਂ ਠੀਕ ਹੈ ਜੀ ਮੇਰੇ ਉਹਨਾਂ ਨੇ ਕੁਰਬਾਨੀ ਭੜੀ ਫਕੀ ਹੂੰ ਹੂੰ ਬਗਨਾਰਕ ਵੀ ਵਾਹੇ ਜਿਵੇਂ ਨੇ ਸਮਝਿਆ ਜੋ ਤੁਮੀ ਵੀ ਗੋਲਰਾਨ ਕਾ ਕੀ ਕਹਿ ਰਿਹਾ ਆਪਣੀ ਬਾਣੀ ਚ ਮੈਂ ਗੋਲਰਾਨ ਕਾ ਆਪਣੀ ਆਤਮ ਦੱਸ ਰਿਹਾ ਕੁਰਬਾਨੀ ਅੱਛਾ ਜੀ ਹਰ ਭਗਤ ਆਪਣੀ ਕਥਾ ਆਤਮ ਦੱਸ ਰਿਹਾ ਆਪਣੀ ਬਾਣੀ ਚ ਅੱਛਾ ਜੀ ਹਰੇ ਭਗਤੀ ਆਤਮ ਕਥਾ ਪਰ ਬਾਣੀ ਜਿਹਨੂੰ ਸਮਝਾਉ ਨੂੰ ਪਤਾ ਲੱਗ ਜੂਗਾ ਹੂੰ ਹੂੰ ਕ੍ਰਮ ਗਿਆਨ ਵੀ ਆਦਿ ਜੀ ਆ ਉਹ ਤੋਂ ਵੱਧ ਜਿਵੇਂ ਕੋਈ ਨੂੰ ਕੁਝ ਪਤਾ ਲੱਗਦਾ ਵੀ ਉਹਨੇ ਕੀ ਟਾਰਗੇਟ ਬੰਦ ਕੇ ਕੀ ਸੀ ਉਹਦਾ ਕੀ ਟਾਰਗੇਟ ਲੈ ਕੇ ਉਹਨੇ ਪਹੁੰਚ ਗਿਆ ਜਿਵੇਂ ਸਫਾਈ ਹੈ ਠੀਕ ਹੈ ਜੀ ਬੁਲੈਟ ਕੋਸ਼ਾ ਮਦਦ ਉੱਥੇ ਕਹਿੰਦਾ ਕਹਾ ਆ ਜੇ ਕਰਮਣਾ ਨਾ ਸੇ ਹੂੰ ਹੂੰ ਇਹਦਾ ਮਤਲਬ ਇਹ ਉਹਨੇ ਕਰਮੋਂ ਛੱਡਿਆ ਨਹੀਂ ਐ ਕਾਈਪੜੇ ਵਾਲਾ ਹੂੰ ਹੂੰ ਉਹ ਜਾਂ ਸਤ ਆ ਗਈ ਤਾ ਉਹਨੇ ਪਹਿਲਾ ਪੁੱਲ ਬਾ ਦੁਨ ਦਾਤਾ ਛੱਡਿਆ ਜੀ ਐ ਹੂੰ ਹੂੰ ਲਗਦਾ ਉਹਦੇ ਤੇਰੇ ਗੁਣ ਧੀ ਐ ਜੇ ਤੂੰ ਕਰਮਣੀ ਰਾਖਾ ਕਰਦਾ ਠੀਕ ਐ ਅੱਜ ਦੇ ਗਿਆਨ ਨੂੰ ਕਹਿੰਦਾ ਵੀ ਸੱਜਾ ਗਿਆਨ ਜੇ ਸਮਝ ਆ ਜਾਏ ਤਾਂ ਕਰਮ ਦਾ ਨਾਸ਼ ਹੋ ਜਾਂਦਾ ਹੈ ਗਿਆਨ ਤੇ ਆਦਾ ਕਰਮ ਦਾ ਨਾਸ਼ ਹੂੰ ਹੂੰ ਆਹ ਵੇਈਂ ਦਾ ਕਰਨਾ ਮੁਖਤੌਲ ਕੋਈ ਫਰਕ ਨਹੀਂ ਸ਼ਾਇਦ ਪ੍ਰਗਤੀ ਅੰਦਰ ਮੁਕਾਇ ਨੂੰ ਇਸੇ ਕਰਕੇ ਗਿਆਨ ਦੀ ਤਰੱਕੀ ਦੇ ਦਿੱਤੀ ਤਾਂ ਕਿ ਕਰਮ ਦਾ ਨਾਸ਼ ਬੰਨ ਲੈਣ ਲੋਕ ਅੱਜ ਫੇਰ ਪਰ ਪਾਇਆ ਜਾਂਦਾ ਉਹ ਜੀ ਛੁਰੀ ਦਿੱਤੀ ਉਹ ਤਾਂ ਚੋਇਆ ਉਹ ਗਿਆ ਉਹ ਹੋ ਗਿਆ ਫਲਾਣ ਫਿਰ ਕਹਾੜੀਆਂ ਬਣਾਈ ਜਾਂ ਨਾਲੇ ਗੋਲੀ ਪੂਜਾਰੇ ਖੱਤ ਨਾਲ ਹੂੰ ਹੂੰ ਜਦੂਆ ਨੇ ਠੀਕ ਹੈ ਬੜਾ ਮੁਸ਼ਕੜਿਆ ਸਾਡੇ ਲੋਕਾਂ ਦੇ ਯਾਰ ਜਿ ਰੱਖਿਆ ਜਾਂਦਾ ਹੂੰ ਹੂੰ ਸਾਡੇ ਸੰਤ ਵੀ ਉੱਥੇ ਗਏ ਨੇ ਵਿਚਾਰੇ ਪਤਾ ਨਹੀਂ ਕਿੱਥੇ ਲੋਹ ਘੜੇ ਨੇ ਠੀਕ ਹੈ ਜੀ ਹੂੰ ਪਤਾ ਲੱਗ ਹਮਮ ਤੇ ਇਹ ਵੀ ਹੁਣ ਦੱਸੋ ਵੀ ਪੱਟ ਜੋ ਹੈ ਉਹ ਗੁਰੂ ਘਰ ਚ ਕਿਸ ਤਰ੍ਹਾਂ ਕਿਸੇ ਦੇ ਸਾਥ ਗਿਆ ਪੱਟ ਆਏ ਹਾਂਜੀ ਪੱਟਾ ਫਿਰ ਗਿਆ ਵੀ ਲਿਖਦੇ ਰਹਿ ਪੱਟ ਕੰਮ ਕੰਮੀ ਹੋ ਜੇ ਪੱਟ ਕੱਪਤਾ ਲਿਖਦੇ ਹੁੰਦੇ ਸੀ ਸਾਰੇ ਅੱਛਾ ਜੀ ਸਾਰੇ ਸਭ ਆ ਗਏ ਕਾਫੀ ਹਮਮ ਫਿਰ ਆ ਗਿਆ ਵੀ ਅਸੀਂ ਕੁਝ ਗੁਰੂ ਆਪਣੇ ਗੁਰੂ ਰਾਨ ਸਾਹਿਬ ਲਿਖਿਆ ਜਾ ਰਿਹਾ ਸੀ ਅੱਛਾ ਜੀ ਵੀ ਅਸੀਂ ਕੁਝ ਰਚਨਾ ਕਾਫੀ ਚਾਹੁੰਦੇ ਹਾਂ ਦੀ ਫੇਰ ਹੋਣਾ ਜੇ ਵੇ ਦੀ ਸਾਡੀ ਪਰਿਵਾਰਕ ਚਲਦੀ ਪਿੱਛੇ ਅੱਛਾ ਜੀ ਪਰ ਪਰਾ ਚਲਦੀ ਸੀ ਨਾ ਵੀ ਸਾਡਾ ਹਿੱਸਾ ਪਾ ਲਓ ਅੱਛਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੱਸਾ ਪਾਉਣਾ ਚਾਹਦੇ ਸਾਡੇ ਜਿਹੜੇ ਬਜ਼ੁਰਗ ਨੇ ਹੂੰ ਉਹਨਾਂ ਦੇ ਸੀ ਜੇ ਤੁਹਾਡਾ ਸਾਨੂੰ ਵੀ ਚਾਹੀਦਾ ਹੈ ਮੇਰਾ ਪਾਸ਼ਾਨਾ ਦਾ ਕੋਈ ਬੜੀ ਖੁਸ਼ੀ ਦੀ ਗੱਲ ਹੈ ਹਮ ਹਮ ਕਹਿੰਦੇ ਜੀ ਅਸੀਂ ਤਾਂ ਐ ਸ਼ਾਬਦਰਾ ਇਹ ਤਾਂ ਲਿਖ ਦੀ ਸਕਦੇ ਜੇ ਲਿਖਦੇ ਹੋ ਅਸੀਂ ਵਾਲਾ ਦੇਖਦੇ ਹੁੰਦੇ ਹਾਂ ਜੀ ਮਾਰਨਾ ਅਸੀਂ ਸਭੀਏ ਲਿਖ ਸਕਦੇ ਅੱਛਾ ਜੀ ਸਭੀਏ ਆਖਬਤ ਨੇ ਵੀ ਸਭੀਏ ਲਿਖ ਦਿੱਤੇ ਆ ਪਹਿਲੇ ਬਾਤ ਕਰ ਹੂੰ ਬਿਲਾਈ ਭਾਈ ਐਸ ਪੈਟਰੋਲ ਤੇ ਤੁਸੀਂ ਲਿਖੋ ਹੂੰ ਇਹਦੀ ਉਪਤੀ ਕਰਦੀ ਹੈ ਜੇ ਵੀ ਅਸੀਂ ਕਰ ਲਈਏ ਉਪਤੀ ਹੋ ਸਕਦੀ ਹੈ ਅੱਛਾ ਜੀ ਉਪਤੀ ਦਾ ਪਤਾ ਸੀ ਪਰਮੈਸ਼ਨ ਦੀ ਕਰ ਲਈ ਐ ਜੀ ਤਰ੍ਹਾਂ ਵੀ ਕੋਈ ਐ ਨਹੀਂ ਸੀ ਹੂੰ ਬਰਾਬਰ ਬੁਰੇ ਸੀ ਜਿਹੜਾ ਬਰਬ ਕਰਦੀ ਹੋਗਾ ਉਹਨੂੰ ਕੋਈ ਨਹੀਂ ਹੁੰਦੀ ਸਭੇ ਜੱਸਾ ਠੀਕ ਹੈ ਜੀ ਅਗੋਂ ਤੋਂ ਬਾਹਰ ਜਦੋਂ ਗੁਰਦਵਾਰ ਤੋਂ ਹਵੇ ਆਈ ਹੈ ਠੀਕ ਹੈ ਜੀ ਜਿਹੜੇ ਦੇ ਨਿਰਾ ਫਿਰ ਨਾਲ ਅਟੈਚ ਰਹੇ ਨੇ ਅੱਛਾ ਜੀ ਕੋਈ ਤਾਂ ਹੀ ਵਰਤੇ ਰਹੇ ਸੀ ਤਾਂ ਕਿ ਇਹ ਭਲੇਖਾ ਨਾ ਭੇਜੇ ਗੁਰੂ ਜੀ ਜਲੇ ਆ ਭਲੇਖਾ ਨੂੰ ਭੇਜਵੇ ਹੂੰ ਗੁਰੂ ਜੀ ਨੇ ਹੁਦਾਈ ਸੀ ਹੂੰ ਨੇ ਸੱਚਾ ਠੀਕ ਹੈ ਜਿਹਨਾਂ ਦੇ ਗੁਰੂ ਜੀ ਨਾਲ ਉਹ ਸੰਸਾਰ ਲੋਕਾਂ ਨਾਲ ਸੰਸਾਰੀ ਹੋ ਰਹੇ ਨੇ ਉਹ ਕਹਾਣੀ ਆ ਸਕਦੇ ਹੂੰ ਹੂੰ ਕੋਈ ਗਾਂਹ ਅੱਗੇ ਜਾ ਕੇ ਸਾਰੇ ਬਰਾਬਰ ਨੇ ਹੂੰ ਹੂੰ ਸਿੱਪੇ ਫੋੜਾ ਪਾਛੇ ਸਾਰੇ ਪਾਸੇ ਨੇ ਉਸੇ ਵੋਦੇ ਨੇ ਅੱਛਾ ਜੀ ਸਿੱਪੇ ਪਰ ਤਬ ਵਸਾਂ ਕੇ ਲੋ ਅਰੇ ਆਂ ਹਾਂ ਕੋਈ ਸਾਡਾ ਕਰੀਏ ਸਬਜ਼ੀ ਬੜਾ ਛੋਟਾ ਜਿਹੀ ਕੋਈ ਉਹ ਆ ਹੂੰ ਹੂੰ ਕਿਹਦਾ ਸਹੀ ਹੋ ਨਹੀਂ ਸਮਝਦਾ ਤਾਂ ਹੁੰਦੀ ਹੈ ਕੋਈ ਦੱਸਾ ਹੂੰ ਹੂੰ ਜਿਹੜਾ ਦੱਸਿਆ ਉਹ ਦਾ ਜੋ ਜੀ ਉਹ ਪਤਾ ਲੱਗੇ ਉਹ ਤਾਂ ਚੌੜਾਈ ਭੇਰੀ ਵਾਲੀ ਗੱਲ ਦਾ ਪਤਾ ਲੱਗੇ ਹੂੰ ਵੀ ਕੋਈ ਨਹੀਂ ਹੈ ਸਖਾ ਦਾ ਜਮਦੀ ਹੂੰ ਠੀਕ ਹੈ ਉਹ ਬਈ ਵਾ ਜੀ ਠੀਕ ਫਿਰ ਉਹਨੇ ਆਪਣੀ ਆਪਣੀ ਸੀ ਅਸੀਂ ਖੋਜ ਲਈ ਚਲੋ ਹੂੰ ਹੂੰ ਥੋੜੇ ਅਸੀਂ ਆਪਣੇ ਸੁਧਾਰ ਕਰ ਲੈਣੇ ਠੀਕ ਹੈ ਕਿਸੇ ਬਾਅਦ ਤੇ ਨਾ ਕਿਸੇ ਵੀ ਪੱਟਦੇ ਹੈ ਕਿਸੇ ਬੁਰ ਨੂੰ ਹੋਗੀ ਕਹਿੰਦੇ ਕੋਈ ਗੱਲ ਨਹੀਂ ਹੂੰ ਹੂੰ ਤੇ ਜਿਹੜਾ ਕੁਰਬਾਨੀ ਵੀ ਗੁਰੂ ਆ ਗਿਆ ਲਫਜ਼ ਆਸ ਵੀ ਵਾਸਤੇ ਠੀਕ ਹੈ ਜੀ ਉਹਦੇ ਸੀ ਗੁਰਦੋਖਾ ਬੋਲ ਲੈਦੇ ਠੀਕ ਹੈ ਜੀ ਫਰੇਵੀ ਜਿੱਦ ਤੱਕ ਹੀ ਦੇਖਿਆ ਫੀਗਰੀ ਗਰੀ ਦੇ ਫੀਗਰ ਨੂੰ ਮਤਲਬ 3 2 5 ਜਦੋਂ ਪਾਉਂਦੇ ਫੀਗਰ ਨੂੰ ਨਵਾਂ ਆਪ ਸਕਰ ਦਾ ਵੀ ਆ ਸਹੀ ਕੋਣ ਬਰਾਬਰ ਵਾਲਾ ਅਪਣਾਓ ਇਹਦੇ ਨਾਲ ਬਾਅਦ ਚ ਅੱਛਾ ਜੀ ਇਹਨਾਂ ਦਾ ਸਕੇਖਾਇ ਗੁਰੂ ਛੇਲੇ ਵਾਲਾ ਨਾ ਬਣਾ ਲਿਓ ਹੂੰ ਹੂੰ ਇਹ ਪੜ੍ਹਨ ਤਾਂ ਨਹੀਂ ਦਰਨੋ ਕਿ ਸੰਗਣਾ ਉਹ ਤਾਂ ਆ ਨੇ ਆਪ ਛੱਗਿਆ ਇਹਨਾਂ ਨੂੰ ਪੌਣ ਦੇ ਕੇ ਫਿਰ ਆਪ ਪੌਣ ਲਈਓ ਤੁਸੀਂ ਹੂੰ ਹਮਮ ਉਹਦੇ ਦੀ ਹੋ ਇਹਨਾਂ ਦੇ ਫਤਿਹਾਂ ਜਾਣਾ ਉਹਨਾਂ ਦਾ ਗੁਰੂ ਤੇ ਵਾਲਾ ਹੁੰਦਾ ਸੀ ਪਰ ਆਪਾਂ ਦੇ ਠੀਕ ਹੈ ਜੀ ਉਹਦਾ ਸਾਰਾ ਸਾਡੇ ਹਮਮ ਉਹਨੇ ਆਪ ਲਿਖਿਆ ਤਾਂ ਅਸੀਂ ਪਾਜੇ ਆਤ ਅੰਤ ਇੱਕ ਹੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਹਮਾਰਾ ਲਖ ਪਰਤ ਕੇ ਤੇ ਆਪਣਾ ਸਾਰਿਆਂ ਦਾ ਭਾਈ ਉਹੀ ਗੁਰੂ ਹੈ ਇੱਕੋ ਕਦਮ ਕਰਤੀ ਤੇ ਰੋਜ਼ ਰਹਿ ਰਾਤ ਅਸੀਂ ਪੜਦੇ ਹੂੰ ਹੂੰ ਐ ਰੋਜ਼ ਵੀ ਭਾਵੇਂ ਜੇ ਸਿਰਫ ਜੱਤਾ ਰੋਜ਼ ਪੜ੍ਹਨ ਤਾਂ ਕਿ ਇਹਨਾਂ ਦੇ ਯਾਦ ਰਹੇ ਹੂੰ ਹੂੰ ਰੋਜ਼ ਪੜ੍ਹਿਆ ਜਾਂ ਨਾ ਪੜ੍ਹੇ ਕੁਝ ਹੋਰ ਜਾਂਦੇ ਬੰਤੇ ਕੁਝ ਹੋਰ ਜਾਂਦੇ ਹੂੰ ਹੂੰ ਅੜਦੇ ਹੋਈਆਂ ਪਰ ਪਤਾ ਹੀ ਨਹੀਂ ਪੜਦੇ ਕੀ ਹਾਂ ਉਹਨਾਂ ਨਾਲ ਪੜ੍ਹਦੇ ਹੂੰ ਹੂੰ ਬੰਤੇ ਹੋਰ ਬੈਠੇ ਆ ਪੜ੍ਹਦੇ ਕੁਝ ਹੋਰ ਹੂੰ ਹੂੰ ਐ ਜਾ ਹੈ ਸਭਿਆਂ ਚ ਕੋਈ ਕਿਸੇ ਗੁਰੂ ਦੀ ਵਡਿਆਈ ਦੀ ਹੈ ਗੁਰੂ ਆਨੇ ਕੇਮੇ ਪਰਮੈਸ਼ਰ ਨੂੰ ਪਾਇਆ ਹੂੰ ਉਹ ਸਾਡੀ ਕੋ ਗੱਲ ਰਹੀ ਹੈ ਹੂੰ ਹੂੰ ਉਹਨਾਂ ਨੇ ਗੁਰਬਾਣੀ ਉਹਨਾਂ ਦੇ ਭੇਜ ਦਸਨੇ ਵਾਲੀ ਨੇ ਉਹ ਗੁਰਨਾਮ ਪਹਿਲੇ ਜਿਹੜੇ ਸੁਮਈਏ ਨੇ ਨਾ ਅੱਛਾ ਜੀ ਨੇ ਪਹਿਲਾ ਪਹਿਲਾ ਲਿਖਿਆ ਹੂੰ ਪਹਿਲੇ ਹੀ ਲਿਖਿਆ ਸੀ ਹਾਂ ਉਹ ਪਰਪੇ ਚਲਦੇ ਪਰਥਾਏ ਨੇ ਅੱਛਾ ਜੀ ਮੈਨੇ ਮਾਲੇ ਦੇ ਵਿੱਚ ਕੀ ਮੈਂ ਉਹਨਾਂ ਨਾਲ ਉਹਨਾਂ ਦੀ ਭਾਵਨਾ ਪਰ ਮਦਰ ਜੀ ਇਤੇ ਤੱਕ ਅਸੀਂ ਕਿ ਵੀ ਉਹਨਾਂ ਦੀ ਸਿੱਖਿਆ ਕੀ ਹੈ ਗੁਰਨਾਨਕ ਦੀ ਉਹ ਦੱਸ ਜੀ ਸਾਡੀ ਹੂੰ ਹੂੰ ਗੁਰਨਾਨਕ ਦੇ ਸਿੱਖਾ ਕੀ ਸਿੱਖਿਆ ਸਾਡੇ ਵਾਸਤੇ ਜਾਂ ਮੈਂ ਬੋਲਾਂ ਗੁਰਬਾਣੀ ਇਹ ਜਿੱਥੇ ਲਈ ਹੈ ਹੂੰ ਹੂੰ ਮੈਂ ਕੋਈ ਨਾ ਹੋਈ ਕੁਰਬਾਨ ਜੋ ਕੀ ਬੁਝਿਆ ਹੈ ਉਹ ਦੱਸੀ ਹੈ ਪਟਾਣ ਹੂੰ ਹੂੰ ਪ੍ਰਾਪਤ ਹੋਇਆ ਉਹ ਦੱਸਿਆ ਹੂੰ ਹੂੰ ਪ੍ਰਾਪਤ ਕਰਨਾ ਪ੍ਰਾਪਤ ਕਰਕੇ ਉਹ ਅਸੀਂ ਦੱਸਣਾ ਹੂੰ ਪ੍ਰਾਪਤ ਕਰਕੇ ਦੱਸ ਦੂਗਾ ਉਹ ਅਵਸਥਾ ਚਲੇਗਾ ਉਹ ਜਿਹੜੀ ਅਵਸਥਾ ਜਨਨਕ ਹੈ ਹੇ ਪਰਤੋਂ ਦੇਲੇ ਠੀਕ ਹੈ ਇਹਨਾਂ ਕਰਕੇ ਉਹਨਾਂ ਦੇ ਸਭਈਏ ਕੁਰਬਾਨੀ ਦੇ ਵਿੱਚ ਲਿਖ ਕੇ ਬਰਾਬਰ ਨਹੀਂ ਦੇ ਕੇ ਬਰਾਬਰ ਕਰਤੇ ਪਰਤ ਨੂੰ ਕਿਤੇ ਹੂੰ ਹੂੰ ਦੀ ਬਾਣੀ ਚ ਅੱਛਾ ਜੀ ਕੀ ਇਸ ਸਭਈਏ ਕੁਰਬਾਨੇ ਬਕਾਇ ਉੱਤੇ ਫੇੜੀ ਵੀ ਕੁਰਬਾਨੀ ਕਰਤਾ ਸਤਾ ਜਾ ਸਕਦਾ ਲੁਕ ਜੇਕਰ ਉਹ ਸਤਾ ਬੇਤਾ ਕੱਟੀ ਹੋ ਜਾਂਦੀ ਹੈ ਪੂਜਕ ਨਹੀਂ ਜੀ ਪਾਸਾ ਬਿਲਕੁਲ ਵੀ ਠੀਕ ਹੈ ਵਿਅਕਤੀ ਪੂਜਾ ਦੀ ਗੱਲ ਬੋਲ ਨਹੀਂ ਅੱਜ ਵੀ ਸਵਾਲ ਆਉਂਦਾ ਜੀ ਅੱਜ ਵੀ ਸਵਾਲ ਆਏ ਵੀ ਕਈ ਵਾਰ ਹੂੰ ਇਹ ਗੁਰਬਾਣੀ ਦੀ ਵਿਅਕਤੀ ਪੂਜਾ ਵਾਸਤੇ ਕੋਈ ਜਗ੍ਹਾ ਹੈ ਠੀਕ ਹੈ ਫਿਰ ਅਸੀਂ ਬੰਦੇ ਫਿਰ ਬੰਦੇ ਦੀ ਵਿਧੀ ਹੈ ਹੂੰ ਹੂੰ ਫਿਰ ਵਿਅਕਤੀ ਪੂਜਾ ਦੇ ਅਰਥ ਕਰਾ ਦੇ ਵੀ ਤੁਸੀਂ ਹੂੰ ਹੂੰ ਇਹ ਦੁਬਾਰਾ ਕਹੋ ਠੀਕ ਹੈ ਜੀ ਜਿਉ ਜਿਉ ਹੁਣ ਆਪਾਂ ਅਰਥ ਕਰਾਂਗੇ ਆਪਾਂ ਨੂੰ ਇਹ ਗੱਲ ਸਪਸ਼ਟ ਹੋਈ ਜਾਊਗੀ ਕਿ ਇਹ ਚ ਵਿక్తి ਪੂਜਾਨੀ ਹੈ ਜੀ ਅੱਛਾ ਜੀ ਉਹਨੇ ਕਹਾਣੀ ਤੇ ਹੀ ਅਰਥ ਜਾਂ ਕੀਤੇ ਨੇ ਹਮ ਹਮ ਬਿਲਕੁਲ ਨੇ ਬਾਖੜਾਂ ਹੈ ਅੱਛਾ ਜੀ ਹਮ ਹਮ ਜੀ ਇਹ ਤਾਂ ਮੈਂ ਸਰ ਸਾਇਆ ਦੇਵਤੋਂ ਕੋ ਇਹ ਹੋਣਾ ਰਹੇ ਤੇ ਹੂੰ ਹੂੰ ਰੁਕ ਕਰ ਰਹੇ ਤੇ ਵਾਹ ਪਾਪਿਸ਼ਰੋ ਜੀ ਆ ਗਏ ਹੂੰ ਦੇਵਤੇ ਉੱਪਰ ਤੇ ਖੜੇ ਹੋ ਗਏ ਹੂੰ ਹੂੰ ਖੜੇ ਨੀ ਗੁਏ ਅੱਛਾ ਜੀ अच्छा जी। कुलुबो देव इर तोर मुरा का कट गया। ठीकड़े जाल बच गया सी। हम्म हम्म। कुलुबो के। हम्म। वो जरूर इर गया सी। उधर तो सीगा जिथे आ गल होईया। हम्म हम्म। बोल हमारी छोटी सारी। अच्छा जी। ਦੀ ਬੜੀ ਨਹੀਂ ਇਹਦਾ ਵਿਰੋਧ ਨਹੀਂ ਕੀਤਾ ਤੇ ਤੂੰ ਕਿਹਾ ਕਿ ਅਸੀਂ ਕੋਈ ਸੁਰ ਵਿੱਚ ਹਮ ਹਮ ਬਰਕਰਾਰ ਰੱਖ ਕੇ ਆੜੀ ਬਣਾਈ ਅਰੇ ਸਾਹਿਬ ਹਮ ਹਮ ਪਤਾ ਨਹੀਂ ਹੈ ਨਾ ਉਹ ਕਹਾਣੀ ਦੇ ਬਰੋਲ ਨਹੀਂ ਹਮ ਹਮ ਕਰਨਾ ਹਮ ਹਮ ਉਹ ਵੇਲੇ ਵੀ ਦੋਈਆਂ ਦਾ ਬਰੋਲ ਨਹੀਂ ਕਰਨਾ ਗੁਰੂਆਂ ਨੇ ਆਹ ਪਾਇਰ ਲਗੇ ਠੀਕ ਹੈ ਪੰਦੇਓ ਛੇਕਦਾ ਵੀ ਹੂੰ ਹੂੰ ਕੀ ਹੋਇਆ ਕੀ ਨਹੀਂ ਹੋਇਆ ਵੈਦਿਕਾ ਦਾ ਪਲੋਂ ਨੇ ਜਾਣ ਕੋਈ ਜਗਾ ਦੀ ਕੀਤਾ ਹੂੰ ਹੂੰ ਇਹਨਾਂ ਪਤਾ ਲੱਗਿਆ ਹੋਊਗਾ ਹੂੰ ਤਾਂ ਬਿਲਕੁਲ ਅੱਖਾਂ ਨਕਲ ਮਾਰਦੀ ਰੋੜੀ ਠੀਕ ਦੇਖਿਆ ਖਾਬੀ ਜੀ ਇਹ ਤੇਹਾ ਕਿ ਬਿਲਕੁਲ ਹੈ ਕੱਢਿਆ ਜਿਹਦੇ ਤੇ ਠੀਕ ਹੈ ਫਿਰ ਆਪਾਂ ਹੁਣ ਇਹ ਅਰਥ ਕਰਕੇ ਦੁਸ਼ਤ ਕਰ ਦਾਂਗੇ ਉਹ ਜਿੰਨੀਆਂ ਗਲਤੀਆਂ ਹੋਈਆਂ ਨੇ ਜੀ ਹੋਰ ਸਾਹ ਹੋ ਜਾਂਦੀ ਇਹਨਾਂ ਦਸਤੀਆਂ ਦਾ ਭਾਣ ਤੇ ਬਣਦਾ ਹੀ ਨਹੀਂ ਹੁਣ ਠੀਕ ਹੈ ਆਪਾਂ ਨਾਲ ਦੀ ਨਾਲ ਉਹ ਵੀ ਕੰਪੇਅਰ ਕਰੀ ਜਾਵਾਂਗੇ ਅਰਥ ਤੇ ਜਿਹੜੇ ਆਪਣੇ ਆਪਾਂ ਉਹ ਵੀ ਦੱਸੀ ਜਾਵਾਂਗੇ ਤੇ ਆਪਾਂ ਫਿਰ ਹੁਣ ਬਹੁਤ ਧੰਨਵਾਦ ਹੁਣ ਆਪਾਂ ਫਿਰ ਅਰਥ ਸ਼ੁਰੂ ਕਰਦੇ ਹਾਂ